श्लोक महल्ला 5व हब गुण तंडे नानक जियो मैकु थीए मै नर गुण ते क्या होवे कौन जेवड़ दा तार ना कोई जाचक सदा जाचोवे ए नानक जियो सारे गुण ता तेरे रे तेरे गुण है नी हो निर्गुण नी हो सकदा कौन सारे तेरे विच है ਹਾਂ ਕੋਈ ਨਹੀਂ ਦੱਸ ਸਕਦਾ ਹਾਂਜੀ ਇਹ ਮਨ ਕਹ ਰਿਹਾ ਜੀ ਚੇਤੇ ਨੂੰ ਤੁਸੀਂ ਕਹਿ ਦੀ ਅੱਛਾ ਜੀ ਹਾਂਜੀ ਤਾਂ ਜੇਵੜ ਦਾ ਤਾਰਨਾ ਕੋਈ ਜਾਚਕ ਸਦਾ ਜਾਚੂ ਹੋ ਕੋਈ ਦਾਤਾ ਕੋਈ ਹੈ ਦੀ ਹੋ ਤਾਂ ਜਾਚਕ ਸਦਾ ਜਾਚੂ ਵੈ ਇਹ ਕਰਕੇ ਜਾਚ ਸਦਾ ਰੁੱਤਦੇ ਨੇ ਜਾਚਕ ਨੇ ਜਿਹੜੇ ਗੁਰਗਤੇ ਵੱਡਾ ਦਾਤਾ ਤੂੰ ਹੈ ਹੁਣ ਕੀ ਬਾਰੇ ਕਿਹਾ ਜਾ ਰਿਹਾ ਜੀ ਇੱਕ ਵਾਰ ਬੁੱਧੀ ਚਿੱਤ ਨੂੰ ਕਹਿ ਰਹੀ ਹੈ ਜੀ ਹਾਂ ਜੀ ਕਿਉਂਕਿ ਨਾਮ ਚਿੱਤ ਤੋਂ ਹੀ ਮਿਲਣਾ ਹੈ ਜੀ ਹਾਂ ਜੀ ਮਹੱਲਾ ਪੰਜਵਾਂ ਦੇਛ ਜੰਡੜੀ ਊਣ ਮਝੂਣਾ ਗੁਰ ਸੱਜਣ ਜਿਉ ਧਰਾਇਆ ਅੱਬੇ ਸੁਖ ਸੁਹੇਲੜਾ ਸੁੱਤਾ ਜਗ ਸਬਾਇਆ ਜੀ ਜਾ ਰਹੀ ਹੈ ਊਣ ਮਝੂਣਾ ਗੁਰ ਸੱਜਣ ਜਿਉ ਲੱਗ ਗੁਰਸਿੱਧ ਜਨਾ ਉਹ ਉੜ ਬੜੂਣਾ ਹੋਰ ਪੂਰਾ ਗਿਆ ਨਹੀਂ ਹੈ ਉਹਦੇ ਕੋਲ ਗਿਆਨ ਪੂਰਾ ਨਹੀਂ ਹੈ ਤੇ ਜਿਹੜੀ ਹੈਗੀ ਤੇਹੀ ਹੈ ਪੁਰਾਣੀ ਹੈ ਉਹ ਦੂਰਾ ਘਰਿਆ ਹੋਇਆ ਸੱਜਣ ਦਾ ਦੂਰਾ ਹੈ ਦੇ ਵਿੱਚ ਆਪਾਂ ਸੋ ਕੋ ਸਾਰਾ ਜੱਗ ਸੁੱਤਾ ਪਿਆ ਐ ਸੋ ਉਹ ਆਪਣੇ ਆਪ ਨੂੰ ਸਾਰਾ ਸਭਾ ਸੇਲੜਾ ਸਭ ਜੱਗ ਸੁੱਤਾ ਪਿਆ ਜੱਗ ਸੁખી ਬਣਦੇ ਪਏ ਵੀ ਅਸੀਂ ਬੜਾ ਸੋਖੀ ਜੀ ਸਤਿਆਨ ਸੋ ਕਹਿਣਾ ਕੋ ਚੱਲ ਜਾਣਾ ਸੋ ਕਹਿ। ਦੇਹ ਗੁਰ ਸੱਜਣ ਜੀਉ ਤਰਾਇਆ। ਉਹ ਸੱਜਣ ਜਿਹੜਾ ਹੈਗਾ ਉਹ ਊਣ ਹੀ ਹੈ। ਪੂਰਾ ਨਹੀਂ ਹੈ ਉਹ ਪੂਰਾ ਹੈ। ਊਣ ਹੈ। ਛਿਜਰੀ ਪੁਰਾਣੀ ਉੱਤੇ ਚਲੀ ਜਾਂਦੀ ਹੈ ਉਹਦੇ ਜ ਗਿਆਨ ਪੂਰਾ ਨਹੀਂ ਹੋ ਰਿਹਾ। ਅਛਾ ਤਰਾਇਆ ਤੋਂ ਭਾਵ ਕੀ ਹੈ ਰਿਆ ਹੋਇਆ ਰੱਖਿਆ ਹੋਇਆ ਉਲਬਿਣੂੜੀ ਰੱਖਿਆ ਹੋਇਆ ਉਹ ਪੂਰਾ ਭਰਿਆ ਹੋਇਆ ਦੀ ਹੈ ਪਰ ਲੋਾਸਤੇ ਤਾਂ ਆਏ ਸੀ ਭਰਿਆ ਹੈ ਨਹੀਂ ਉਹ ਕੂਣ ਤਾਂ ਸਾਡ ਵਾਸਤੇ ਸਾਰੇ ਬਸ ਆਪਣੇਆਂ ਨੂੰ ਗੱਡੀ ਬੈਠੇ ਨੇ ਪੂਰਾ ਦੇਛ ਜੰਦੜੀ ਦੇ ਰਹੀ ਹੈ ਫਿਰ ਠੀਕ ਹੈ ਊਣ ਮਝੂਣਾ ਹੁੰਦਾ ਵੀ ਇਹ ਕਮੀ ਵਾਲਾ ਹੈ ਉਲਬਿਣੂੜਾ ਕਮੀ ਵਾਲਾ ਗਿਆਨ ਕੱਟ ਹੈ اچھا ਇਹ ਸੇ ਗਿਆਨ ਕਿੱਥੋਂ ਲਾਊਗਾ ਆ ਸਾਧਕੋ ਨੇ ਜੀ ਰੱਖਿਆ ਹੋਇਆ ਇਹਦੇ ਵਿੱਚ ਦੇਹ ਦੇ ਵਿੱਚ ਜੀ ਹੈ ਜੀ ਦੀ ਗੱਲ ਲੈਣੇ ਗੁਰੂ ਨੂੰ ਉਹ ਜੀ ਦੀ ਲੈਣੇ ਪੰਜ ਜਾਲ ਉੱਤੇ ਜੀ ਕੋਲੇ ਜੀ ਜੋ ਸ਼ਬਦ ਵਿਚਾਰ ਕਰਾਂਗੇ ਕਮੀ ਦਾ ਚਿੱਤ ਕੋਲੇ ਪੂਰੀ ਹੋਣੀ ਜਾ ਕੇ ਗੁਰ ਸੇਵਾ ਸ਼ਬਦ ਵਿਚਾਰਿਆ ਸ਼ਬਦ ਵਿਚਾਰ ਦਾ ਜੀ ਕਰਦਾ ਜੀ ਤੇ ਗੁਰ ਕੀ ਸੇਵਾ ਕੀ ਹੋਵੇ ਕੋ ਨੂੰ ਜੁਰਬੂ ਜੇ ਸ਼ਬਦ ਵਿਚਾਰ ਜੀ ਕਰੇ ਤਾਂ ਪੂਰਾ ਹੋਵੇ ਉਹ ਠੀਕ ਹੈ ਹੱਬੇ ਸੁਖ ਸੁਹੇਲੜਾ ਆਪਣੀ ਜਾਨ 'ਚ ਸੁਖੀ ਹੈ ਆਪਲੀ ਸੁਖ ਸੁਹੇਲੜਾ ਬਣੇ ਬੈਠਾ ਹੈ ਤਾ ਇਹਨੂੰ ਨਹੀਂ ਪਤਾ ਕਿ ਜਾਕਾ ਵਾਸਾ ਗੁਰਮੇ ਸੋ ਕਿਉਂ ਸੋਵੇ ਸੁਖ ਹੈ ਜੀ ਇਸ ਗੱਲ ਦਾ ਗਿਆਨ ਨਹੀਂ ਹੈ। ਗੋਰ ਕੀ ਨੂੰ ਕਹਿੰਦੇ ਹੋ ਤੇ ਕਬਰ ਨੂੰ ਕਹਿੰਦੇ ਆ। ਕਬਰ ਨੂੰ ਗੋਰ ਆ ਬਾਲ ਸਰੀਰ ਨੂੰ ਗੋਰ ਕਹਿੰਦੇ। ਜਦ ਤੱਕ ਸਰੀਰ ਨਹੀਂ ਛੁੱਟਦਾ ਤੂੰ ਸੁਖੀ ਕਿਵੇਂ ਰਹੇਂਗਾ ਇਹਨੂੰ ਗਈ ਗੋਰ ਛੁੱਟ ਗਈ। ਹਾਂਜੀ। ਦਰਬਾਰ ਸੱਚਾ ਤੁਦ ਤਖਤ ਸਿਰ ਸ਼ਾਹ ਪਾਤਸ਼ਾਹ ਨਹਿਚਲ ਚੋਰ ਛੱਤ ਤੇਰਾ ਦਰਬਾਰ ਵੱਡਾ ਹੈ ਤੇਰਾ ਕਸ ਸੱਚਾ ਹੈ ਸੱਚਾ ਤੁਧ ਦਾ ਤੇਰਾ ਕਰਤਾ ਹਮੇਸ਼ਾ ਰਹਿਣ ਵਾਲਾ ਸੱਚਾ ਹੈ ਉਹ ਦਰਬਾਰ ਤੇਰਾ ਵੱਡਾ ਪਾਤਸ਼ਾਹ ਤੂੰ ਪਾਤਸ਼ਾਹ ਹੈ ਜਿਹਨੇ ਵੀ ਦੁਨੀਆ ਦੇ ਵਿੱਚ ਗਿਆਨ ਵਾਲ ਹੋਏ ਨੇ ਗਿਆਨੀ ਦੇ ਇਹ ਛਾਲ ਧਿਆਨ ਦੇਣ ਵਾਲੇ ਹੋਏ ਨੇ ਤੂੰ ਇਹਨਾਂ ਦੇ ਸਿਲਤੇ ਛਾਲ ਦੇ ਸਿਲਤੇ ਪਾਤਸ਼ਾਹ ਹੈ ਤੇ ਤੇਰੇ ਕੋਲੋਂ ਲੈ ਕੇ ਗਿਆਨ ਦਿੰਦੇ ਇਹ ਜਿਹੜਾ ਤੇਰੀ ਗੱਲ ਸੁਣ ਕੇ ਗਾਣ ਦਾ ਦੇ ਨੇ ਸਿਰ ਛਾਂ ਪਾ ਕੇ ਜੇਕਰ ਚੌੜ ਛੱਤ ਤੇਰੇ ਤੇ ਜਿਹੜਾ ਚੌਰ ਹੈ ਤੇ ਤੇਰੇ ਤੇਲੀ ਛੱਤ ਹੈ ਆਕਾਸ਼ ਦੀ ਇਹ ਅਡੋਲ ਹਮੇਸ਼ਾ ਰਹਿਣ ਵਾਲੀ ਅੱਛਾ ਜੀ ਇਹ ਜਿਹੜਾ ਵੱਡਾ ਤੇਰਾ ਦਰਬਾਰ ਸੱਚਾ ਤੁਦ ਤਖਤ ਹੈ ਇਹ ਤਖਤ ਹੈ ਜੀ ਹੈ ਜੀ ਤਾਂ ਅੱਛਾ ਜੀ ਇਹ ਦਿਖਦਾ ਨਹੀਂ ਹੈਗਾ ਹੈ ਅੱਛਾ ਸਕਦਾ ਇੱਕ ਕੋਣ ਸਚਤਾ ਰਤੇ ਨਾ ਉਹ ਨਗਤੇ। ਜਾਨੀ ਦਾ ਦਰਬਾਰ ਸਾਹਿਬ ਵੀ ਬਾਹਰ ਬਣਾ ਲਿਆ ਅਕਾਲ ਤਖਤ ਸਾਹਿਬ ਵੀ ਬਾਹਰ ਬਣਾ ਲਿਆ ਇੱਥੇ ਦੋਹੇ ਆ ਰਹੇ ਨੇ ਬਣਾ ਲਿਆ ਆਪਣਾ ਸਾਡਾ ਹੀ ਹੈ। ਜਿੱਥੇ ਚੌਰ ਛਤ ਹੈ ਰੱਖ ਲਿਆ ਜੱਤਵਾਲੀ ਉੱਤੇ। ਠੀਕ ਹੈ ਔਰ ਇਹ ਦਰਬਾਰ ਸਾਹਿਬ ਚ ਅੱਜ ਕੱਲੇ ਸ਼ਲੋਕ ਆਮ ਪੜਦੇ ਆ। ਠੀਕ ਹੈ ਜੀ। ਜੋ ਭਾਵੇ ਪਾਰ ਬ੍ਰਹਮ ਸੋਈ ਸੱਚ ਨਿਆਉ। ਜੇ ਭਾਵੇ ਪਾਰ ਬ੍ਰਹਮ ਮਿਲੇ ਥਾਉ। ਪਾਰਬ੍ਰਮ ਦੀ ਇੱਛਾ ਹੋਈ ਸਾਕੇ ਨਾ ਜੋ ਬਾਬਾ ਪਾਰਬ੍ਰਮ ਨੂੰ ਸੋਈ ਸਾਕੇ ਨਾ ਜੇ ਮੰਨ ਲੀਏ ਪਾਰਬ੍ਰਮ ਨੂੰ ਚਾਹੁੰਦਾ ਹੈ ਜੇ ਅਕਾਲ ਸਰ ਤੈਵੀ ਗਿਆ ਸੀ ਉਹਦਾ ਇੱਛਾ ਹੀ ਸੀ ਸਾਚੀ ਰਜ਼ਾ ਬਿਨਾਂ ਨਹੀਂ ਸੀ ਟਹਿ ਸਕਦਾ ਉਹਦੇ ਕੋ ਨਹੀਂ ਸੀ ਟਹਿ ਸਕਦਾ ਆਪਣੇ ਅੰਦਰ ਚਾਕੇ ਦੇਖੋ ਸਾਡੀ ਗਲਤੀ ਕਿੱਥੇ ਆਪਣੀਆਂ ਗਲਤੀ ਨੂੰ ਦੇਖ ਲੈਰੀ ਉਹਦੇ ਉਹਨਾਂ ਦੇ ਠੀਕ ਹੈ ਜੀ जे भाव है पारब्रह्म निथावें मिले थाऊं ये पारब्रह्म हूं पाजवे त निथावे नु थो है, है जे बंद हो जावे मिलला त निथावे अच्छा निथावें तो की जी निथाव नहीं है अच्छा जी अच्छा प्रदेशी भी है भी है ਅਸੇ ਜਿਹੜਾ ਸਾਨੂੰ ਹੁੰਦਾ ਜੇ ਬੰਨ ਪਰਦੇਸੀ ਜੇ ਸਭ ਦੇਸ਼ ਤੇ ਦੇਸ਼ੇ ਪਰਾਇਆ ਇਹ ਤਾਨੂੰ ਸਮਝੀ ਨਾ ਫਿਰ ਉੱਥੇ ਪਾਜਵੇ ਤਾਂ ਇਹ ਪਾਰ ਬ੍ਰਹਮ ਦੇ ਘਰ ਚਲਾ ਜਾਵੇ ਰਹੇ ਫਿਰ ਪਾਰ ਬ੍ਰਹਮ ਰਹੇ ਦਾ ਤਖਤ ਦੇ ਵਿੱਚ ਪਾਰ ਦਾ ਤਖਤ ਹੈ ਆਲ ਤਖਤ ਉਹਦੇ ਵਾਲੇ ਤਖਤ ਤੇ ਜਗ੍ਹਾ ਇਹਨੂੰ ਮਿਲ ਜਵੇ ਹਾਂਜੀ ਜੋ ਕੀ ਕਰਤਾਰ ਸਾਈ ਭਲੀ ਗੱਲ ਜਿਨੀ ਪਛਾਤਾ ਖਸਮ ਸੇ ਦਰਗਾਹ ਮੱਲ ਜਿਹੜੀ ਗੱਲ ਜੋ ਕਰਤਾਰ ਨੇ ਕੀਤੀ ਹੈ ਉਹ ਗੱਲ ਭਲੀ ਜੇ ਉਹ ਹੋਇਆ ਤਾਂ ਡਿਆ ਕਾਹ ਨੂੰ ਗਿਆ ਲੱਗਣ ਚਾਹੀਦਾ ਵੀ ਐਸਾ ਕੁਝ ਨਹੀਂ ਹੋਣਾ ਚਾਹੀਦਾ ਉੱਥੇ ਕਿਉਂਕਿ ਪਹਿਲਾਂ ਹੋਇਆ ਠੀਕ ਹੈ ਜੀ ਜਿਨੀ ਪਛਾਤਾ ਖਸਮ ਸੇ ਦਰਗਾਹ ਮੱਲ ਜਿਹਨਾਂ ਨੇ ਖਾਸਾ ਪਛਾਣਨੇ ਦਰਗਾਹ ਮੱਲ ਲੈ ਆ ਦਰਗਾਹ ਦਾ ਨਹੀਂ ਹੈ ਅਸਲ ਠੀਕ ਹੈ ਜੀ ਸਹੀ ਤੇਰਾ ਫਰਮਾਨ ਕਿਨੇ ਫੇਰੀ ਐ ਸਹੀ ਤੇਰਾ ਫਰਮਾਨ ਕਿਨੇ ਨਾ ਫੇਰੀ ਐ ਫੇਰ ਆਲੀ ਜਾ ਸਕਦਾ ਕਿਸੇ ਤੋਂ ਫਰਮਾਨ ਜਿਹੜਾ ਫਰਮਾਨ ਆ ਗਿਆ ਵਾਪਸ ਨਹੀਂ ਜਾ ਸਕਿਆ ਬਦਲਿਆ ਨਹੀਂ ਜਾ ਸਕਿਆ ਉਹ ਸਹੀ ਹੋ ਕਰੇ ਸਹੀ ਹੋ ਕਰ ਫਰਮਾਨ ਤੇਰਾ ਤੇਰਾ ਕੋਈ ਵੀ ਫੈਸਲਾ ਗਲਤ ਨਹੀਂ ਹੁੰਦਾ ਹਾਂਜੀ ਕਾਰਨ ਕਰਨ ਕਰੀਮ ਕੁਦਰਤ ਤੇਰੀ ਐ कारण ਕਰਲਾ करीम ਇਹ ਕਾਰਨ ਕਾਰਨ ਕਰੀਮਾ ਕੁਦਰਤੀ ਤੇਰੀ ਤੇਰੀ ਹੈ ਇਹ ਹੀ ਤੇ ਤੇਰੀ ਖੂਦਤ ਹੈ ਤੇਰੀ ਕੁਦਰਤ ਕਦੇ ਵੀ ਬੇਸਾਫੀ ਨਹੀਂ ਕਰਦੀ ਤੇਰੀ ਕੁਦਰਤ ਜਿਹੋ ਹੁੰਦੀ ਹੈ ਉਹਨੂੰ ਰੋਕਿਆ ਨਹੀਂ ਜਾ ਸਕਦਾ ਉਹ ਕਟਣਾ ਵਾਪਰ ਕੇ ਹੀ ਕਰਦੀ ਹੈ ਜੋ ਤੇਰੀ ਇੱਛਾ ਹੁੰਦੀ